ਤੇ ਹਟੜੇ ਬਾਜ਼ਾਰ ਸੌਦਾ ਕਰਨੀ ਵੰਜਾਰਿਆ ਸੱਚ ਵਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ ਤੇ ਹਟਲੇ ਲਗਾਤੇ ਲਾਂਦੜ ਹੱਟੀ ਹੁੰਦੀ ਹੱਟੀ ਹਟੜੇ ਅੱਛਾ ਜੀ ਬਾਜ਼ਾਰ ਸੌਦਾ ਕਰਨ ਪਰ ਜਾ ਰਿਆ ਸੱਚ ਲੱਦਿਆ ਸੇ ਸੱਚੜੇ ਪਾਸਾਰ ਜਿਹੜੇ ਸੌਦਾਦਾਰ ਨਾਲ ਦੁਕਾਨ ਤੋਂ ਜਿਹੜੇ ਬਰਚਾ ਦੇ ਨੇ ਸੌਦਾ ਕਰਦੇ ਨੇ ਜੀ ਨਾ ਸੌਦਾ ਪਛਾਣ ਕੇ ਪਹਿਲਾਂ ਬਸ ਪਛਾਣ ਕੇ ਜਿਹੜੇ ਅਸਲੀ ਬਣ ਨੇ ਬਣਜ ਕਦ ਜਾਣਦੇ ਨੇ ਜਿਹਨੂੰ ਸਮਝ ਆ ਉਹ ਸੱਚ ਦੀ ਸੱਚ ਦਾ ਸੌਦਾ ਫਰਖ ਦੇ ਲੈਣਾ ਸੱਚੀ ਦੁਕਾਨ ਤੋਂ ਸੱਚ ਬਕਰ ਕੇ ਨਾ ਦਸਿਆ ਸਿਰ ਸੱਚਲੇ ਪਾਸਾਰ ਉਹ ਉਹਨਾਂ ਦਾ ਸੱਚਾ ਪਸਾਰਾ ਹੁੰਦਾ ਉਹਨਾਂ ਦਾ ਹੀ ਵਪਾਰ ਵਧਿਆ ਕੋਈ ਸਰਵ ਹੋਏ ਨੇ ਉਹਨਾਂ ਦੀ ਬੁੱਧੀ ਫਿਕਸਤ ਹੋਈ ਹੈ ਕੋਈ ਸਮਝ ਲੋ ਹੋਏ ਨੇ ਸਰਵ ਬੁੱਧ ਉਹਨਾਂ ਦੀ ਹੋਈ ਹੈ ਉਹਾਂ ਦੇ ਜਲਤਨ ਲੋਕਾਂ ਦੇ ਵਿੱਚ ਆ ਗਏ ਤਨ ਲੋਗ ਵਿੱਚ ਸਮਾਵੇ ਪਹਿਲਾਂ ਪਹਿਲਾਂ ਕਾਨੂੰਨਾ ਦਾ ਸਮਾਇਆ ਹੈ ਸਨਾਨੋ ਕਲ ਜਪ ਤਿਰਪਾ ਵਾਂ ਕਾ ਸਮਾਇਆ ਸਮਾਵਾ ਤਨਾ ਬਣ ਤਨ ਮਾਇ ਸਮਾਵਾ ਤਾਪੋ ਪਾਨ ਕਰੋ ਸੋ ਆਵਾ ਤੇਨੇ ਲੋਭਾਂ ਦੀ ਭੂਤੀ ਦੇ ਅੰਦਰ ਹੋ ਜਾਂਦਾ ਨੇ ਤੋ ਹੋ ਕੇ ਹਾਂਜੀ ਠੀਕ ਹੈ ਤੇ ਬਾਜ਼ਾਰ ਫਿਰ ਇੱਥੇ ਦੁਨੀਆ ਦੀ ਗੱਲ ਹੈ ਜੀ ਇਹ ਨਾ ਜਿਹਨਾਂ ਤੋਂ ਆਪਾਂ ਲੈਨੇ ਆ ਸੌਦਾ ਜਿਹਨਾਂ ਆਦਮੀਆਂ ਦੇ ਉੱਤੋਂ ਆਪਾਂ ਦੇ ਗੁਰੂ ਬਣੇ ਨੇ ਜਿਹੜੀਆਂ ਦੁਕਾਨਾਂ ਵਾਲੀਆਂ ਹੋਈਆਂ ਨੇ ਜਿੱਥੇ ਜਾ ਕੇ ਉਪਦੇਸ਼ ਲੈਣਦੇ ਨੇ ਉਹਨਾਂ ਦੀ ਗੱਲ ਉਪਦੇਸ਼ ਚੱਲ ਰਿਹਾ ਪੰਜਾਬ ਦੇ ਵਿੱਚ ਤਾਂ ਸੌਦਾ ਸਾਰੀਆਂ ਨੇ ਪਰ ਸੌਦਾ ਪਹਿਣਾ ਬਾਸ ਤੋਂ ਕੇ ਤੌ ਕੀਤੇ ਆਪਾਂ ਸੱਚ ਦਾ ਸੌਦਾ ਲਈਦਾ ਹਾਂ ਜਿਹਾਂ ਦੇ ਕੋਲ ਸੱਚ ਪੱਕਾ ਜਿਹੜੇ ਉਹ ਲੈਣ ਦੇਦੇ ਨਾ ਫੋਟਾ ਦਾ ਫਾਰੀ ਰੇ ਜਾਂ ਮੈਂ ਕੋਈ ਝੂਠਾ ਪਛਾਰਾ ਉਹ ਨਾ ਹੋਇਆ ਦੂਜਾ ਦਾ ਪਛਾਰਾ ਨਹੀਂ ਹੋਇਆ ਬੁੱਧੀ ਉਹਨਾਂ ਦੀ ਸਗੋਂ ਜਿਹੜਾ ਪਹਿਲਾ ਸੀ ਨਾ ਗਿਆਨ ਉਹ ਵੀ ਕੱਟ ਗਿਆ ਅੱਛਾ ਅੰਦਰ ਪ੍ਰਕਾਸ਼ ਨਹੀਂ ਹੋਇਆ ਪ੍ਰਕਾਸ਼ ਨਹੀਂ ਹੋਇਆ ਸਗੋਂ ਹਨੇਰਾ ਪੈ ਗਿਆ ਪਰ ਪ੍ਰਕਾਸ਼ ਹੋਊਗਾ ਤਾਂ ਚਰਨ ਵਰੂਗਾ ਤਾਂ ਪ੍ਰਕਾਸ਼ ਹੋਊਗਾ ਪ੍ਰਕਾਸ਼ ਹੋਊਗਾ ਪ੍ਰਕਾਸ਼ ਹੋਊਗਾ ਤਦ ਤੱਕ ਹੋਊਗਾ ਹਾਂ ਠੀਕ ਹੈ ਜੀ ਵੀ ਜੇ ਆਪਾਂ ਸੱਚ ਵਖਰੇ ਤੇ ਅੱਗੇ ਫਿਰ ਦਾ ਕੀ ਭਾਵਨ ਫਿਰ ਠੀਕ ਹੈ ਜੀ ਬ੍ਰਹਮਿਆਦੀ ਕੇ ਮਨ ਪਰਗਾਹ ਜੈਸੇ ਤੁਹਾਡੇ ਉੱਪਰ ਆ ਕਾਸ ਇਹ ਹਾਂ ਠੀਕ ਹੈ ਇਹਨੂੰ ਪਸਾਰਾ ਕਹਿੰਦੇ ਹਨ ਜੀ ਇਹਨੂੰ ਪਸਾਰਾ ਤੇਰਾ ਪਸਾਰਾ ਤੇ ਇਹਨਾਂ ਦੇ ਆਪਾਂ ਜੇ ਅਰਥ ਪੜੀਏ ਇਹ ਕਹਿੰਦੇ ਹਨ 73 ਦੇ ਦਾ ਭਾਵ ਹੈ ਤਿੰਨ ਹੱਟਾਂ ਵਾਲੇ ਭਾਵ ਧਰਤੀ ਪਾਤਾਲ ਤੇ ਆਕਾਸ਼ ਬਾਜ਼ਾਰ ਭਾਵ ਬ੍ਰਹਮੰਡ ਉਹ ਕਹਿੰਦੇ ਹੈ ਭਾਈ ਧਰਤੀ ਉਹ ਸੱਚੇ ਪਸਾਰ ਦੇ ਅਨੁਆਈ ਹਨ ਉਹ ਫਿਰ ਕਿੱਥੋਂ ਮੜਿਆ ਜੀਵਤਾ ਉਸੇ ਵਪਾਰ ਕਰਦੇ ਨੇ ਸੱਚ ਵੱਖਰੇ ਕਿੱਥੋਂ ਆਇਆ ਫਿਰ ਤੇ ਹੱਟੜੇ ਦਾ ਕੀ ਅਰਥ ਕੀਤਾ ਜੀ ਸੌਦਾ ਕਰਦੇ ਤਿੰਨ ਲੋਕ ਸੌਦਾ ਕਿਹੜਾ ਸੌਦਾ ਆ ਸ਼ਰੀਰ ਤੇ ਬਿਨਾ ਦਿੱਤਾ ਲਿਆ ਜਾਇ ਨਹੀਂ ਸਕਦਾ ਪਹਿਲਾਂ ਇੱਥੇ ਇਹ ਤੋਂ ਕ੍ਰੋਸ ਕਰ ਗਿਆ ਗੱਲ ਨੂੰ ਪਾਟਾ ਪਾਤਾ ਸਰੀਰ ਤੇ ਗੁਰੂਖਾ ਦੇ ਹੀ ਤੇਗਾ ਲੋਕਾਂ ਦੇ ਦੇ ਹੀ ਰਹੇ ਨੇ ਜੀ ਇਹ ਤੇ ਜਿਵੇਂ ਕਹਦੇ ਲੋਕ ਤਾਂ ਬੇਹੀਦੀ ਹੁੰਦੀ ਹੈ ਗਰਭ ਦੇ ਵਿੱਚ ਉਹਦਾ ਨਹੀਂ ਹੋ ਸਕਦਾ ਇਹਨਾਂ ਨੂੰ ਕੱਖ ਵੀ ਨਹੀਂ ਪਤਾ ਇਹਨਾਂ ਅਲਫਤਾਲ ਦੀਆਂ ਗੱਲਾਂ ਬਾਤਾਂ ਨੇ ਬੇਮਤਲ ਦੀਆਂ ਗੱਲਾਂ ਨੇ ਕੋਈ ਚਰਨਾ ਪੈਣਾ ਥਿੰਨ ਲੋਕ ਘੜੇ ਘੜੇ ਨੇ ਥਿੰਨ ਲੋਕ ਐਸਟੂਡੈਂਟ ਪਹਿਲਾਂ ਖੜੇ ਨੇ ਥਿੰਨ ਲੋਕ ਜੇ ਆਪਾਂ ਜਾਂਦੇ ਤਾਂ ਕਿਣਾ ਜੀ ਬਈਰੇ ਤੇ ਲੋਕ ਸੌਦਾ ਕਰਦਾ ਝੂੜਦਾ ਕੋਈ ਸਰਪੰਚ ਤੋਂ ਬਿਨਾਂ ਹੀ ਗੱਲ ਮਾਰਦੀ ਕੋ ਤੇਨ ਲੋਕ ਮਾਲ ਦਾ ਕਿੱਕੇ ਹਾਂਜੀ ਤਾਂ ਆਪਾਂ ਕਹਿੰਨੇ ਕਹਿਣ ਦਾ ਭਾਵ ਉਹਨਾਂ ਹਟਾਂ ਤੋਂ ਸੌਦਾ ਕਰਨ ਜਾਣੇ ਆ ਬੰਦੇ ਤੇਨਾ ਹਟਾਂ ਤੋਂ ਸੌਦਾ ਲੈਦੇ ਨੇ ਬੰਜਾਰੇ ਹਰ ਜਿ ਕੋ ਨੇ ਜੈ ਜੇ ਸੱਚ ਹੁੰਦਾ ਉੱਥੋਂ ਹੀ ਨੰਨੇ ਬਣ ਜਾਂਦੇ ਬਣ ਜਾਂਦੇ ਆਂ ਲੋਕਾਂ ਨੂੰ ਕਰ ਬਣ ਕੇ ਬਣ ਜਾਂਦਾ ਨਾ ਕਰੀਦਾ ਹੁੰਦਾ ਬਣ ਜਾਂਦੇ ਪੋਜੀਟਿਵ ਨੇ ਹਰ ਜਿਹੜਾ ਨਾਮ ਹੈ ਵਪਾਰੀ ਕਾਸੀ ਕਾਂਪੇ ਦੇ ਵਪਾਰੀ ਅੱਜ ਬਣ ਜਾ ਕਾਸੀ ਤਾਬਾ ਕਿਦੋਂ ਨੌਂ ਵਾਲੀ ਸਾਤਰ ਬਣ ਬਣ ਜਾ ਨਾਮ ਗੋਬਿੰਦ ਦਾ ਜਾਲ ਕੋਲ ਜਾਦੇ ਆਂ ਸੋ ਵਰਜ ਕਰ ਕਹਿਤਾ ਉੱਤੇ ਵਰਜਾਦਾ ਪੋਜ਼ਿਟਿਵ 네ਗੇਟਿਵ ਲਾਇਆ ਹੀ ਨਹੀਂ ਅਸਲ ਚ ਵਰਜਾਦੇ ਹੁੰਦੇ ਹੀ ਪੋਜ਼ਿਟਿਵ ਬਣ ਠੀਕ ਹੈ ਜੀ ਤੇ ਇਸੇ ਸੱਚੜੇ ਪਾਸਾਰ ਭਾਵ ਉਹਨਾਂ ਦਾ ਜਿਹੜਾ ਗਿਆਨ ਹੈ ਉਹਦੇ ਵਿੱਚ ਪ੍ਰਸਾਰ ਹੁੰਦਾ ਵਾਧਾ ਹੁੰਦਾ ਹੈ ਜੀ ਵਾਧਾ ਹੁੰਦਾ ਹੀ